ਭਗਤ ਕਬੀਰ ਜੀ ਨੇ ਖਖੇ ਅੱਖਰ ਤੋਂ ਪੜਾਤਾ 8ਵੀਂ ਪੌੜੀ ਚ ਸੰਦੇਸ਼ ਮਨ ਆਵਾ ਖੋੜੇ ਛਾੜ ਨਾ ਦੇ ਦਿਸਤਾਵਾ ਹਣੀ ਕਕਾ ਇਹੇ ਖੋੜ ਮਨ ਆਵਾ ਖੋੜ ਹੁੰਦੀ ਹੈ ਅੱਗੇ ਕੱਚੇ ਰਸਤੇ ਹੁੰਦੇ ਸੀ ਉਹ ਜਿਹੜੀ ਜਿੱਥੇ ਗੱਡੀ ਗੱਡਾ ਕੋ ਚੱਲਦਾ ਸੀਗਾ ਉਹ ਜਦਾਂ ਛੜੀ ਗਹਿਰੀ ਹੋ ਜਾਂਦੀ ਸੀ ਡੂੰਗੀ ਹੋ ਜਾਂਦੀ ਸੀ ਵੀ ਉਹਨੂੰ ਖੋੜ ਕਹਿੰਦੇ ਸਨ ਮਾਨ ਰਸਤੇ ਲਈ ਦੇ ਵਿੱਚ ਚੱਲਣ ਲੱਗ ਜਾਂਦਾ ਠੀਕ ਰਸਤੇ ਤੇ ਜਾਂ ਚੱਲਦਾ ਖੋੜ ਬਨ ਆਵਾ ਕਹਿੰਦੇ ਯਾ ਹਿਰਦੇ ਚ ਆ ਗਿਆ ਕਹ ਲੋ ਖੋੜ ਦਿਲ ਦੇ ਚ ਆ ਤੇ ਕਿ ਖੱਠਾ ਯਾ ਖੋੜ ਬਨ ਆਵਾ ਇਹ ਖੋੜ ਆਪਣੇ ਜਿੱਦ ਘਰ ਚ ਦਾਸ ਕਰ ਲੈਂਦਾ ਖੋੜੇ ਦਾਸ ਛੱਡ ਜਾਂਦਾ ਹੈ ਤੇ ਸਾਵਾ ਫਿਰ ਇਹ ਖੁੱਡ ਨੂੰ ਛੱਡ ਕੇ ਆਪਣੀ ਦੂਜੇਵੇਂ ਸੱਪ ਖੁੱਡ 'ਚ ਆ ਜਾਂਦਾ ਹੈ ਤੇ ਮਨ ਸਾਫ ਦਾ ਖੁੱਡ 'ਚ ਛੱਡ ਕੇ ਉਹਨੂੰ ਪਤਾ ਜੇ ਬਾਹਰ ਜਾਊ ਬਾਹਰ ਮੌਸਤ ਉਹਨ ਤੋਂ ਬਾਹਰ ਜਾਂਦਾ ਖਾਣ ਪੀਣੇ ਨੂੰ ਕੋਈ ਖੋੜੇ ਛਾੜ ਨਾ ਦੇ ਦਸ ਫਿਰ ਖੁੱਡ ਛੱਡ ਕੇ ਬਾਹਰ ਵੀ ਹੋਣਾ ਹਾਂਜੀ ਠੀਕ ਹੈ ਵੀ ਖੋੜ ਦਾ ਮਤਲਬ ਹੈ ਦੇ ਰਸਤੇ ਤੇ ਜੇ ਤੁਰਨ ਲੱਗ ਜਵੇ ਕਾਦੀ ਬਦਲਦਾ ਲੀ ਦੇ ਵਿੱਚ ਚੱਲਦਾ ਗੱਡਾ ਤਾਂ ਸਹੀ ਚੱਲਦਾ ਹੈ ਜ਼ੋਰ ਘੱਟ ਲੱਗਦਾ ਕੋਈ ਜੇ ਲੀ ਪਾਰਦੇ ਨੇ ਬਾਹਰ ਕੱਢਦੇ ਨੇ ਤੇ ਜ਼ੋਰ ਜ਼ਿਆਦਾ ਲੱਗਦਾ ਇਸ ਕਰਕੇ ਲੀ ਦੇ ਵਿੱਚ ਚੱਲਣਾ ਨਹੀਂ ਸਹੀ ਰਸਤੇ ਤੇ ਚੱਲਣਾ ਹੈ ਅਥਾਨੀ ਨਾਲ ਚੱਲਿਆ ਜਾ ਸਕਦਾ ਖੋੜ ਜੇ ਆਪਾਂ ਖੁੱਡ ਲੈਨੇ ਆ ਖੁੱਡ ਦੇ ਫੈਂਸ ਵਿੱਚ ਲੈਨੇ ਤਾਂ ਜ਼ਿਆਦਾ ਬੈਟਰ ਹੈ ਖੋੜ ਆ ਗਿਆ ਜਦੋਂ ਸੱਪ ਖੋੜੇ ਤੇ ਵੱਢ ਜਾਂਦਾ ਫਿਰ ਖੋੜਾ ਆਪਣੇ ਨਿੱਜ ਘਰ ਚ ਆ ਗਿਆ ਉੱਥੇ ਉਹਨੂੰ ਖੋੜੇ ਤੇ ਖਤਰਾ ਕੋਈ ਨਹੀਂ ਫੌਂ ਨਹੀਂ ਜਾਂਦਾ ਬਾਹਰ ਉਹਨੂੰ ਖਤਰਾ ਹੈ ਬਾਹਰ ਦਾ ਬੜੀ ਸਭ ਦਾ ਡੀਣਾ ਪੈਂਦਾ ਉਹਨੂੰ ਜਿੱਥੇ ਖਤਰਾ ਨਹੀਂ ਰਹੇਗਾ ਉੱਥੇ ਆਮ ਨਾਲੇ ਫਿਰ ਖੋੜੇ ਨਿੱਜ ਘਰ ਜਾ ਕੇ ਟਿਕ ਜਾਂਦਾ ਇੱਕ ਵਾਰ ਉਹਨੂੰ ਰਾਸ ਗੜ ਫੇਰ ਨਹੀਂ ਸਕਦਾ ਜਾਂਦਾ ਵਾਪਸ ਅੱਛਾ ਇਹ ਤਾਂ ਆਪਾਂ ਇਹਦਾ ਅਰਥ ਫੇਰ ਖੋਡੇ ਕਰਾਂਗੇ ਹਾਂਜੀ ਜਿਆਦਾ ਅੱਛਾ ਅੱਛਾ ਕਿਉਂਕਿ ਖੋੜ ਤੇ ਸਿਆਰੀ ਹੈ ਖਖਾ ਇਹ ਹੈ ਖੋੜ ਮਨਾਵਾ ਖੋੜ ਦੇ ਵਿੱਚ ਜੇ ਆ ਜਾਵੇ ਰਹਿਣ ਵੇਲੇ ਖੋਡੇ ਸਖਤੇ ਚੱਲ ਹਾਂਜੀ ਖੋਡੇ ਛਾੜਨਾ ਦਾ ਦੈਦ ਇਸ ਜੇ ਤੇਰੇ ਜਾਂਦਾ ਹੈ ਭਜਦਾ ਫੇਰ ਇਹ ਜਾਂਦਾ ਜਿਹੜੋਡੇ 10 ਸਾਲ ਦੇ ਸ਼ਾਵਾਂ ਦੇ ਜਨਮ ਦੇ ਜਦਾ ਹੈ ਗੀਆਂ ਇਹਨੂੰ ਹਾਂ ਜੀ ਖਸਮੇ ਜਾਣ ਖਿਮਾ ਕਰ ਰਹਾ ਤੋ ਹੋਏ ਨਿਖਿਓ ਅਖੇ ਪਦ ਲਹ ਇਹ ਫਿਰ ਜਦ ਖਸਮ ਨੂੰ ਜਾਣ ਲੈਂਦਾ ਖਸਮ ਕੀ ਹੈ ਸੱਚ ਸਭ ਦਾ ਖਸਮ ਖਸਮ ਹੈ ਖਸਮ ਦੀ ਡੈਫੀਨੇਸ਼ਨ ਦੇਤੀ ਸੱਚ ਕਹਤਾ ਸੱਚ ਹੈ ਖਸਮ ਜੇ ਸੱਚ ਨੂੰ ਜਾਣ ਲੈਂਦਾ ਇਹ ਆਪਣੇ ਆਪ ਨੂੰ ਜਾਣ ਲੈਂਦਾ ਆਪ ਸਤ ਸਰੂਪ ਇਹਦਾ ਬੋੜ ਵੀ ਸਤ ਸਰੂਪ ਆਤਮ ਨੂੰ ਜਾਣ ਲੈਂਦਾ ਸਤ ਨੂੰ ਜਾਣ ਲੈਂਦਾ ক্ষমা ਕਰਦਾ ਫਿਰ ਸਭ ਕਸਦਾ ਤਿਆਗ ਕਰ ਦਿੰਦਾ ਸਤ ਨੂੰ ਝੂਠ ਦੀ ਲੋੜ ਨਹੀਂ ਐ ਸੱਚ ਵਿੱਚ ਝੂਠ ਦੀ ਭੁੱਖ ਨਹੀਂ ਹੁੰਦੀ ਸ਼ਰੀਰ ਝੂਠਾ ਸ਼ਰੀਰ ਮਾਇਆ ਦਾ ਮਾਇਆ ਸ਼ਰੀਰ ਨੂੰ ਭੁੱਖਾ ਨਾ ਆਇਆ ਜੀ ਤੇਰੇ ਆਪਣਾ ਅੰਦਰੋਂ ਤਿਆਗ ਕਰ ਦਿੰਦਾ ਮਾਇਆ ਦਾ ਮਾਇਆ ਦਾ ਬੋਝ ਛੱਡ ਦਿੰਦਾ ਸ਼ਰੀਰ ਦੀ ਲੋੜ ਹੈਗੀ ਐ ਸ਼ਰੀਰ ਦੀ ਲੋੜ ਬੰਦ ਕੇ ਚੱਲਦਾ ਖਸਮੇ ਜਾਣ ਖਿਮਾ ਕਰ ਰਿਹਾ ਆ ਖਸਮ ਨੂੰ ਜਾਣ ਲੈਂਦਾ ਸੱਚ ਨੂੰ ਜਾਣ ਲੈਂਦਾ ਆਪਣੇ ਮੂਲ ਨੂੰ ਜਾਣ ਲੈਂਦਾ ਆਇਆ ਧੋਖਾ ਨਾ ਰੱਖਦਾ ਆਇਆ ਤਾਂ ਮਾਇਆ ਵਾਲੂ ਨਹੀਂ ਭਜਦਾ ਉਹ ਹੁੰਦਾ ਸ਼ਾਂਤ ਰਹਿਣਾ ਸ਼ਾਂਤੀ ਰੱਖਦਾ ਆਪਣੇ ਸੰਤੋਖ ਰੱਖਦਾ ਹਾਂਜੀ ਤੋ ਹੋਏ ਨਿਖਿਓ ਅੱਖ ਹੈ ਪਦਲ ਹੈ ਇਹ ਡੋਲਦਾ ਨਹੀਂ ਹੈਗਾ ਤੋ ਤੋ ਵੀ ਵੱਜਾ ਮਨ ਨੂੰ ਬੰਦ ਕੇ ਰੱਖਦਾ ਡੋਲਦਾ ਨਹੀਂ ਹੈ ਮਨ ਖਾਇਬਾ ਦਾ ਇਹ ਜੇ ਢੋਲਦਾ ਨਹੀਂ ਤਾਂ ਇਹਦਾ ਜਿਹੜਾ ਬੁੱਧ ਹੈ ਘਟਦਾ ਜਿੰਨੀ ਬੈਟਰੀ ਚਾਰਜ ਹੋ ਗਈ ਗਿਆਨ ਆ ਗਿਆ ਰਹਿੰਦਾ ਜੇ ਲੋਭ ਬੁੱਧੀ ਦਾ ਇਸਤੇਮਾਲ ਮਾਇਆ ਵੱਲ ਜ਼ਿਆਦਾ ਕਰਦਾ ਹੈ ਉਹ ਸਬਰ ਸਬਰ ਤੋਂ ਘਟ ਜਾਂਦੇ ਦੇ ਸਬਰ ਸਬਰ ਤੋਂ ਉਹਦਾ ਘਟਣਾ ਹੀ ਖਾਇ ਹੁਣ ਹਾਂਜੀ ਤੋਂ ਹੋਏ ਨਿਖਿਓ ਜੇ ਨਿਖਿਓ ਹੋ ਜਵੇ ਤੋ ਫੇਰ ਖਹਿ ਪਰ ਇਹਨੂੰ ਪ੍ਰਾਪਤ ਹੋ ਜਾਂਦਾ ਹੈ ਜੀ ਆਹ ਖਹਿ ਪਰ ਪ੍ਰਾਪਤ ਹੋ ਜਾਂਦਾ ਠੀਕ ਹੈ ਜੀ ਫੇਰ ਉਪਦੇਸ਼ ਹੈ ਜੀ ਖਖੇ ਖੋਜ ਪਰੈ ਜੋ ਕੋਈ ਜੋ ਖੋਜੇ ਸੋ ਬੋਹਰ ਨਾ ਹੋਈ ਖਖਾ ਖੋਜ ਪਰੈ ਜੇ ਕੋਈ ਜੋ ਖੋਜ ਆਲੇ ਪਾਸੇ ਚੱਲ ਜੇ ਕੋਈ ਜੇ ਕੋਈ ਖੋਜਣ ਲੱਗ ਜੇ ਅੰਦਰੋਂ ਖੋਜ ਕਰਨ ਲੱਗ ਜਵੇ ਆਪਣੀ ਆਤਮ ਦੀ ਖੋਜ ਕਰ ਆਪਣੇ ਬੂਧ ਦੀ ਖੋਜ ਕਰਨ ਲੱਗ ਜਵੇ ਔਰ ਖੋਜਦਾ ਖੋਜਦਾ ਖੋਜ ਲਵੇ ਜਿੰਨੇ ਖੋਜ ਪੂਰੀ ਹੋ ਜਲਵੇ ਜੋ ਫੇਰ ਵੀ ਦੁਬਾਰਾ ਜਨਮ ਚ ਠੀਕ ਹੈ ਜੀ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਜਲ ਤਰਤਨਾ ਲਾਵੇ ਬਾਰਾ ਖੋਜਣ ਨੂੰ ਬਹੁਤ ਟਾਈਮ ਲੱਗ ਜਾਂਦਾ ਲੱਗ ਸਕਦਾ ਹੈ ਗੰਦੇ ਖੋਜਣ ਨੂੰ ਵੀ ਟਾਈਮ ਲੱਗ ਸਕਦਾ ਹੈ ਖੋਜ ਬੂਝ ਜਦ ਕਰ ਤਾ ਵਿਚਾਰ ਜੋ ਕਰੇ ਵਿਚਾਰਾ ਬਸ ਜਾਂ ਖੋਜ ਬੂਝ ਲੈਂਦਾ ਫਿਰ ਵਿਚਾਰ ਕਰਦਾ ਫਿਰ ਪਾਵਜਲ ਤਲ ਨੂੰ ਨਹੀਂ ਚੱਲ ਲੱਗਦਾ ਹੈ ਪਾਵਜਲ ਤਲ ਨੂੰ ਜਾਂਦੀ ਲੱਗਦਾ ਖੋਜਣ ਨੂੰ ਔਰ ਬੂਝਣ ਨੂੰ ਚੱਲ ਲੱਗਦਾ ਟਾਈਮ ਲੱਗਦਾ ਸਮਾਂ ਲੱਗਦਾ ਠੀਕ ਹੈ ਇਸ ਤੋਂ ਬਾਅਦ ਇੱਕ ਵਾਰ ਫੇਰ ਖਖੇ ਹੀ ਅੱਖਰ ਦਾ 44 ਨੰਬਰ ਪੌੜੀ ਚੋਂ ਫੇਰ ਉਪਦੇਸ਼ ਹੈ ਜੀ ਖਖਾ ਖਿਰਤ ਖਬਤ ਗਏ ਕੀਤੇ ਖਿਰਤ ਖਬਤ ਅਜ ਹੁਣਾ ਚੇਤੇ ਖਖਾ ਖਿਰਤ ਖਬਤ ਜਿਨ੍ਹਾਂ ਨੇ ਸੰਤੋਖ ਨਹੀਂ ਰੱਖਿਆ ਉਹਨਾਂ ਦਾ ਖਿਰ ਗਿਆ ਫਿਰ ਸਭ ਕੁਝ ਬਾਰਾ ਫੇਰੀ ਹੋਈ ਜਪਤਾਪ ਕੀਤਾ ਗਿਆ ਭਾੜ ਨਹੀਂ ਲੱਗਿਆ ਖਿਰ ਖਪਤ ਗਏ ਕਿੱਥੇ ਚਲੇ ਗਏ ਤਾਂ ਸਭ ਕੁਝ ਉਹਨਾਂ ਦਾ ਇੱਥੇ ਹੀ ਰਹਿ ਗਿਆ ਖਿਰ ਤੇ ਖਪਤ ਗਏ ਕਿੱਥੇ ਸੰਤੋਖ ਦਾ ਸੂਤ ਟੁੱਟਿਆ ਹੋਇਆ ਸੀ ਸਭ ਕੁਝ ਖਿੰਡ ਗਿਆ ਆ ਕੇ ਖਪਤ ਹੁਣ ਵੀ ਖਪਤ ਰਹੇ ਉਹਨਾਂ ਦੇ ਪਿੱਛੇ ਵਾਲੇ ਵੀ ਉਹੀ ਕੰਮ ਲੱਗੇ ਹੋਏ ਨੇ ਪਰ ajo ਜਾਗੇ ਨਹੀਂ ਹਨ ਉਹ ਜਾਗੇ ਨਹੀਂ ਵੀ ਪਹਿਲਿਆਂ ਨੂੰ ਨਹੀਂ ਕੁਝ ਮਿਲਿਆ ਦਾਦੂ ਕੀ ਮਿਲ ਉਹੀ ਵਾਲਾ ਫਿਰ ਫਿਰ ਦੀ ਜਨਤ ਚੇਲਣਾ ਘਪਣ ਵਾਲੇ ਆ ਹੀ ਪਏ ਨੇ ਹਟੇ ਦੀ ਅਜੋ ਅਜੋ ਹੁਣੇ ਚੇਤੇ ਅਜੋ ਨੇ ਮਾਲਾ ਫੇਰੀਏ ਮਾਲਾ ਛੱਡੀ ਸਕੂਲਾਂ ਦੇ ਬੱਚੇ ਜਾਂਦੇ ਨੇ ਜਾਂ ਪੜ ਜਾਂਦੇ ਨੇ ਸਕੂਲ ਛੱਡ ਦਿੰਦੇ ਨੇ ਇਹਨਾਂ ਦਾ ਕਾਲਜ ਦਾ ਕੋਸ ਕਿਉਂਦੀ ਪੂਰਾ ਹੋਇਆ ਪ੍ਰਾਪਤੀ ਵੀ ਕੁਝ ਹੋਇਆ ਹਾਂਜੀ ਅਬ ਜਗ ਜਾਨ ਜੋ ਮਨਾ ਰਹੇ ਜਹ ਕਾ ਵਿਛੜਾ ਤੈ ਥਿਰ ਲਹਿ ਜਗਤ ਨੂੰ ਜੇ ਉਹ ਨਾਸਵੰਤ ਜਾਣ ਕੇ ਜਗਤ ਤੋਂ ਮੁਨਕਰ ਹੋ ਕੇ ਰਹੇ ਜਾਗਰਣ ਜੁੜਿਆ ਨਾ ਰਹੇ ਜਗਤ ਤੋਂ ਮੁਨਕਰ ਹੋ ਕੇ ਜਹ ਕਾ ਵਿਛੜਿਆ ਇਹ ਵਿਛੜਿਆ ਆਪਣੇ ਮੂਰ ਨਾਲ ਆਪਣੇ ਮੂਰ ਨਾਲ ਹੀ ਵਿਛੜ ਜਾਂਦਾ ਜੇ ਜਾਗਰਣ ਨਾਲ ਜੁੜੇ ਸਰੀਰ ਨਾਲ ਨਾਲ ਜੁੜੇ ਸਰੀਰ ਤੋਂ ਤਾਂ ਬਹੁਤ ਕੇ ਰਹੇ ਫਿਰ ਆਪਣੇ ਗੂੜ ਨਾਲ ਜੁੜ ਜਾਂਦਾ ਇਹ ਸਰੀਰ ਨਾਲੇ ਜੁੜਿਆ ਰਹੇ ਸੱਚ ਮੰਨ ਕੇ ਜੇ ਜੀਵਨ ਜਗ ਦੇ ਜੀਵਨ ਨੂੰ ਸੱਚ ਕਰਕੇ ਜੁੜਿਆ ਰਹੇ ਫਿਰ ਇਹਦੇ ਨਾਲ ਜੁੜਿਆ ਰਹ ਜਾਂਦਾ ਜੇ ਇਹਨੂੰ ਝੂਠ ਕਰਕੇ ਮੰਨ ਕੇ ਇਹਦਾ ਸਭ ਤਿਆਗ ਕੇ ਆਪਣੀ ਖੋਜ ਗੂੜੀ ਕਰਦਾ ਰਹੇ ਫਿਰ ਉੱਥੇ ਦਿੱਖਿਆ ਉੱਥੇ ਖੋਜਾਂ ਹੀ ਕਰੋ ਨਾ ਜੇ ਜਗ ਨੂੰ ਵਿਥਿਆ ਬਦੂ ਖੋਜਾਂ ਸ਼ੁਰੂ ਕਰੋ ਠੀਕ ਹੈ ਜੀ ਅਬ ਜਗ ਜਾਨ ਜੋ ਮਨਾ ਰਹੇ ਮਨਾ ਦਾ ਮਾਫ ਕੀ ਬਣਦਾ ਜੀ ਗੁਰ ਕਰ ਹੋ ਗਏ ਰਹੇ ਸੰਸਾਰ ਤੋਂ ਸੰਸਾਰ ਨੂੰ ਵਿਥਿਆਨ ਕਰੇ ਸੰਸਾਰ ਦੇ ਵਿੱਚ ਖਚਤ ਨਾ ਹੋਵੇ ਸੰਸਾਰ ਦੇ ਵਿੱਚ ਨੂੰ ਨਾ ਜਾ ਬੇਗਾਨ ਢੂੰਗੇ ਪਾਣੀ ਜੀ ਨੂੰ ਨਾ ਲ ਜਾਣਾ ਬਨਾ ਰਹੇ ਮਾਇਆ ਜਗੋ ਤਾਂ ਤੂੰ ਮਾਇਆ ਤੋਂ ਜਹ ਕਾ ਬਿਛੁਰਾ ਤੈ ਫਿਰਲਾ ਹੈ ਹਾਂ ਜੀ ਤਾਂ ਵਿਛੜਿਆ ਆਪਣੇ ਮੂਲ ਤੋਂ ਉਹ ਮੂਲ ਨਾਲ ਫੇਟੜ ਜਾਂਦਾ ਜਾ ਫਿਰ ਮੂਲ ਨਾਲ ਜੁੜ ਕੇ ਹੀ ਕੋਣ ਅਜੇ ਕਬੀਰ ਸੂਤਾ ਕੀ ਕਰੇ ਬੈਠਾ ਰਹਾ ਔਰ ਜਾਗ ਹੈ ਜੀ ਜਾ ਕੇ ਸੰਗ ਸੇ ਵਿਛੜਾ ਤਾਂ ਹੀ ਕੇ ਸੰਗ ਲਾਗ ਸਾਹੀ ਕੇ ਜੀ ਭਗਤ ਕਬੀਰ ਜੀ ਨੇ ਇੱਥੇ ਤਿੰਨ ਵਾਰ ਬ੍ਰਹਮ ਗਿਆਨ ਦਾ ਖਖੇ ਅੱਖਰ ਦਾ ਉਪਦੇਸ਼ ਦਿੱਤਾ ਹੈ ਜੀ ਹੁਣ ਅਗਲਾ ਹੈ ਜੀ ਗੁਰੂ ਨਾਨਕ ਸਾਹਿਬ ਮਹਲਾ ਪਹਿਲਾ ਪੱਟੀ ਹਾਂ ਜੀ ਖਖੇ ਸ਼ਾਹ ਆलम ਕਰ ਖਰੀਦ ਜਿਨ ਖਰਚ ਦਿਆ ਬੰਦਨ ਜਾ ਕੇ ਸਭ जग ਬੰਦਿਆ ਅਵਰੀ ਨਹੀਂ ਹੁਕਮ ਪਾਇਆ ਜਿਹੜਾ ਹਲਮ ਦਾ ਸਾਰੇ ਦਾ ਮਾਲਕ ਐ ਸ਼ਾਹ ਐ ਜਿਹਦੇ ਸਾਰਾ ਸੰਸਾਰ ਦਾ ਜੋ ਮਾਲਕ ਐ ਕੋਈ ਰਹਿਬਰ ਐ ਸਾਡਾ ਸਾਰਿਆਂ ਦਾ ਮੈਂ ਕੀ ਟੇਕ ਤੇਰਾ ਨਾਮ ਖੁਦਕਾਰਾ ਆ ਨਾਮ ਜਿਹੜਾ ਤੇਰਾ ਖੁਦਕਾਰਾ ਤੇਰਾ ਰਾਧਾ ਸਣਾ ਰਹਿਬਰ ਐ ਨਾਮ ਤਾਂ ਰੋਸ਼ਨੀ ਐ ਨਾ ਚਾਨਣ ਆਵਾਜ਼ ਵੀ ਤੇ ਖੁੱਦ ਗਈ ਉਹਨੂੰ ਦਾਦਰ ਇਹਨਾਂ ਨੂੰ ਖੱਬੇ ਹੋ ਜਾ ਸਕੇ ਹੋ ਜਾ ਉਹ ਤੇ ਬੂਰੇ ਆ ਹੈ ਜਿਹੜਾ ਤੇਰਾ ਸ਼ਬਦ ਹੈ ਤੇਰੀ ਆਵਾਜ਼ ਹੈ ਜਿਹੜੀ ਤੇਰੀ ਮੇਰੇ ਵਾਸਤੇ ਖੁਦ ਕਰ ਤੇਦਾ ਬਚਾਉਣ ਵਾਲਾ ਉੱਚੇ ਦੀ ਮੇ ਤੋਂ ਕਿਤੇ ਵੀ ਅੜਚਣ ਤੋਂ ਡਿੱਗਣ ਤੋਂ ਠੋਕਰ ਤੋਂ ਬਚਾਉਣ ਵਾਲਾ ਠੀਕ ਹੈ ਜੀ ਖਖ ਖੁੰਧਕਾਰ ਸ਼ਾ आलम ਕਰ ਖਰੀਦ ਜਿੰਨ ਖਰਚ ਦੀਆ ਹਰ ਖਰੀਦੇ ਤੇ ਖਰਚ ਦਿਆ ਜਿਹਨੇ ਖਰਚ ਰਾਹ ਦਾ ਖਰਚ ਵੀ ਦਿੱਤਾ ਮੈਨੂੰ ਖਰੀਦ ਲਿਆ ਲਾਲਾ ਗੋਲਾ ਨਹੀਂ ਐ ਤਾਂ ਨਹੀਂ ਹੈ ਵੀ ਮੈਨੂੰ ਕਿਹਾ ਵੀ ਆਹ ਕੁਝ ਖਰੀਦਣਾ ਖਰਚ ਮੈਂ ਤੈਨੂੰ ਆਹ ਖਰੀਦ ਕੇ ਲਿਆਈ ਜਾਂ ਮਾਲਕ ਹੈ ਮਾਲਕ ਦਾ ਵੀ ਖਰੀਦੇ ਬੰਦੇ ਆਏ ਉਹਨੇ ਮੈਂ ਨਹੀਂ ਸੀ ਮੰਨਦਾ ਅਸਲ ਵਿੱਚ ਉਹਦਾ ਸੀਗਾ ਸਾਰੇ ਆਲਮ ਦਾ ਮਾਲਕ ਜੋ ਹੈ ਖਰੀਦ ਕੇ ਉਹਨੇ ਆਪਣਾ ਬਣਾ ਲਿਆ ਮੈਂ ਉਹਨੂੰ ਮੰਨ ਲਿਆ ਆਪਣਾ ਆਪ ਬਚਾਈ ਲਿਖਿਆ ਨਾ ਆਪਣਾ ਆਪ ਵੇਚ ਦਿੱਤਾ ਮੈਂ ਉਹਨਾਂ ਬੇਰਾ ਉਹ ਲਿਆ ਜਿੰਨ ਖਰਚ ਦਿਆ ਕਿ ਹੈ ਆਪੇ ਖਰਚ ਤਾਂ ਉਹ ਨਹੀਂ ਦੇਣਾ ਖਰੀਦ ਦਊਗਾ ਜਿਹਦਾ ਖਰਚ ਤਾਂ ਉਹ ਨਹੀਂ ਦੇਣਾ ਨਾ ਉਹਦਾ ਸਾਡੇ ਨਾਲ ਹੈ ਉਹ ਸ਼ਾ ਆਲਮ ਕਾਰੀ ਖਰੀਦ ਜਿੰਨ ਖਰਚ ਦਿਆ ਜਿਹੜੇ ਜਿਹੜਾ ਉਹਦੇ ਸਾਹਮਣੇ ਵਿਕ ਗਿਆ ਜਿਹਨੂੰ ਉਹਨੇ ਖਰੀਦ ਲਿਆ ਐ ਕਹਿ ਲੋ ਚਾਹੇ ਉਹਦਾ ਫਿਰ ਖਰਚੋਂ ਉਸੇ ਨੇ ਦੇਣਾ ਹੁਣ ਆਪਾਂ ਕੋਈ ਡੰਦਰ ਖਰੀਦਦੇ ਆ ਉਹਦਾ ਖਾਣ ਪੀਣ ਦਾ ਸਾਰਾ ਖਰਚ ਆਪ ਹੀ ਦਿੰਨੇ ਆ ਉਹਦੇ ਕੰਮ ਵੀ ਲੈਣੇ ਆ ਕੰਮ ਵੀ ਲੈਣਦਾ ਖਰਚ ਵੀ ਦਿੰਦਾ ਹਾਂਜੀ ਬੰਦ ਨਹੀਂ ਜਾ ਕੇ ਸਭ जग ਬੰਦਿਆ ਅਵਰੀਕਾ ਨਹੀਂ ਹੁਕਮ ਪਿਆ ਹੋਰ ਕਿਸੇ ਦਾ ਹੁਕਮ ਨਹੀਂ ਹੁਕਮ ਉਸੇ ਦਾ ਚੱਲਦਾ ਹੈ ਉਹਦੇ ਬੰਦੇ ਜਿੰਨੇ ਸਾਰੇ ਕੋਈ ਮੰਨੇ ਕੋਈ ਨਾ ਮੰਨੇ ਗੁਰਮੁਖ ਨੇ ਮੰਨ ਲਿਆ ਹੋਇਆ ਇਹ ਉਹਦੇ ਸਾਹਮਣੇ ਵਿਕ ਗਿਆ ਉਹਦੇ ਹੁਕਮ ਚੱਲਦਾ ਗੁਲਾਮ ਬਿਨਾ ਤਨਖਾਹ ਤੇ ਹੁੰਦਾ ਰੋਸ਼ਨ ਪਾਣੀ ਤੇ ਰੋਸ਼ਨ ਪਾਣੀ ਮਾਲ ਕਰਾ ਤਨਖਾਹ ਕੋਈ ਨਹੀਂ ਗੁਲਾਮ ਕਹਿੰਦੇ ਇਹ ਉਹਨੂੰ ਤਨਖਾਹਦਾਰ ਮੁਲਾਜ਼ਮ ਹੁੰਦਾ ਨੌਕਰ ਹੁੰਦਾ ਨੌਕਰ ਨਹੀਂ ਆ ਚਾਕਰ ਆ ਚਾਕਰ ਹੁੰਦਾ ਬਿਨਾ ਤਨਖਾਹ ਤੇ ਨੌਕਰ ਹੁੰਦਾ ਤਨਖਾਹਦਾਰ ਹਾਂਜੀ ਅਫਰੀਕਾ ਹੁਕਮ ਪਾਇਆ ਹੁਕਮ ਉਦਾਈ ਚੱਲਣਾ ਔਰ ਮੈਂ ਉਹਨੇ ਮੈਨੂੰ ਖਰੀਦ ਲਿਆ ਹੈ ਜੀ ਆਹ ਸਾਰਿਆਂ ਦੇ ਹੁਕਮ ਦਾ ਸਾਰਿਆਂ ਤੇ ਚੱਲਦਾ ਹੈ ਸਭ ਜੱਗੇ ਬੰਨੇ ਪਰ ਮੈਨੂੰ ਦੀਂਦਾ ਬੰਨੇ ਆਇਆ ਮੈਂ ਮੰਨ ਲਿਆ ਖਰੀਦਿਆ ਨਹੀਂ ਨਾ ਉਹਨਾਂ ਨੂੰ ਰਾਹ ਦਾ ਖਰਚ ਖਰਚ ਉਹਨੂੰ ਜਿਹੜਾ ਉਹਦਾ ਹੋ ਹਾਂਜੀ ਠੀਕ ਹੈ ਜੀ ਇਹ ਛੇਵੀਂ ਪੌੜੀ ਦਾ ਉਪਦੇਸ਼ ਸੀ ਜੀ ਮਹੱਲਾ ਪਹਿਲਾ ਪੱਟੀ ਲਿਖੀ ਹੁਣ ਤੀਸਰੇ ਪਾਸ਼ਾ ਦਾ ਕੋਈ ਸੰਦੇਸ਼ ਨੀ ਹੈਗਾ ਖਖੇ ਅੱਖਰ ਦਾ ਬਾਵਨ ਅੱਖਰੀ ਮਹੱਲਾ ਪੰਜਵਾਂ ਚ ਪੌੜੀਆਂ ਨਾਲ ਉਪਦੇਸ਼ ਦਿੱਤਾ ਖਖੇ ਪਹਿਲਾ ਹੈਗੀ ਜੀ 18ਵੀਂ ਖੂਨਾ ਕਛ ਨਹੀਂ ਤਿਸ ਸਮਰਥ ਕਹ ਪਾਹੇ ਜੋ ਦੇਨਾ ਸੋ ਦੇ ਰਹਿਓ ਭਾਵੇ ਤਹ ਤਹ ਜਾਹੇ ਉਹ ਸਮਰੱਥਾ ਪਰਮੇਸ਼ਰ ਉਹਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਖੂਨਾ ਘਾਟ ਕਵੀ ਕੋਈ ਕਰ ਸਭ ਕੁਝ ਹੈ ਕੋਈ ਕਬੀ ਨਹੀਂ ਕਿਸੇ ਗੱਲ ਦੀ ਉਹਦੇ ਕਿਸੇ ਰਸੂ ਦੀ ਕਬੀ ਨਹੀਂ ਉਹਦੇ ਕੋਲ ਜੋ ਦੇਣਾ ਦੇ ਰਿਹਾ ਦਿੰਦਾ ਉਹਨਾ ਹੀ ਆ ਜਨਾਵ ਦੀ ਰਜ਼ਾ ਹੁੰਦੀ ਹੈ ਜੀ ਉਹਦੀ ਆਪਣੀ ਪਸਾਬ ਨਾਲ ਦਿੰਦਾ ਆਪਣੇ ਹਿਸਾਬ ਨਾਲ ਨਾ ਦਿੰਦਾ ਸਾਡੇ ਹਿਸਾਬ ਨਾਲ ਨਹੀਂ ਦਿੰਦਾ ਉਹ ਆਪਣੀ ਵਰਜੀ ਨਾਲ ਦਿੰਦਾ ਉਹ ਦੇ ਰਿਹਾ ਭਾਵਾਂ ਤੈਤੇ ਜਾਏ ਕਿਵੇਂ ਦਿੰਦਾ ਦਿੰਦਾ ਆ ਜਿੱਥੇ ਉਹਦੀ ਇੱਛਾ ਲਈ ਹੱਥੇ ਪਹੁੰਚਦਾ ਭਾਵਾਂ ਭਾਵ ਉਹਦੀ ਇੱਛਾ ਅਨੁਸਾਰ ਉਹ ਆਪੇ ਉੱਥੇ ਚਲਾ ਜਾਂਦਾ ਕਿ ਚਾਬਿ ਤੇ ਉਹ ਨਹੀਂ ਸਕਤੀ ਹੈ ਕਿ ਉੱਤੇ ਬੈਠਾ ਹੀ ਪਛਾਣ ਹੁੰਦਾ ਹੈ ਕਿ ਚਾਬਿ ਨੇ ਪਛਾਣ ਦੱਸਿਆ ਉੱਤੇ ਹਾਂਜੀ ਖਰਚ ਖਜ਼ਾਨਾ ਨਾਮ ਧਨ ਯਾ ਭਗਤਨ ਕੀ ਰਾਸ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੈ ਗੁਣਤਾਸ ਇਸ ਕਰਕੇ ਖਰਚ ਖਜ਼ਾਨਾ ਨਾਮ ਧਨ ਜਿੰਨਾ ਖਰਚਿਆਂ ਦਾ ਨਹੀਂ ਬਦੂਗ ਜਿੰਨਾ ਖਰਚ ਸਕਦਾ ਹੈ ਖਰਚ ਤੇ ਤੇ ਖਰਚੇ ਨਹੀਂ ਹੁੰਦੇ ਬੋਕੜ ਨਹੀਂ ਦੀ ਖਰਚ ਕਰਨਾ ਲੋਭ ਤਾਂ ਆ ਭਗਤਾਂ ਰਾਸ ਭਗਤਾਂ ਨੇ ਇਸੇ ਨੂੰ ਰਾਸ਼ੀ ਇਸੇ ਨੂੰ ਦੌਲਤ ਮੰਨਿਆ ਇਸੇ ਨੂੰ ਤਾਂ ਮਿਲੇ ਭਗਤਾਂ ਨੇ ਹੋਰ ਕੋਈ ਤਾਂ ਨਹੀਂ ਮਿਲੇ ਸੰਸਾਰ ਇਹ ਭਗਤਾਂ ਦਾ ਇਹ ਰਾਸ ਹੈ ਉਹਨਾਂ ਦੀ ਖਿਮਾ ਗਰੀਬੀ ਆਨੰਦ ਵਾਕਿ ਖਿਮਾ ਗਰੀਬੀ ਆਨੰਦ ਸਹਿਜ ਇਹ ਇਹ ਰਾਸਪਤਾਂ ਦੇ ਬੰਦੀਆਂ ਜਿਹਦਾ ਨਾਮ ਤੁਨ ਰਾਸਤਰੀ ਹੈ ਉਹਦੇ ਕੋਲ ਖਿਣੋ ਗਰੀਬੀ ਕਿਵਾਂ ਦਾ ਮਤਲਬ ਤਿਆਗ ਮਾਇਆ ਦਾ ਤਿਆਗ ਜਹਰ ਦਾ ਤਿਆਗ ਗਰੀਬੀ ਗਰੀਬੀ ਹੁੰਦਾ ਨਿਬਰਤਾ ਆਪਣਾ ਕੁਛ ਨਹੀਂ ਬਲਾਇਆ ਬੋਲ ਨੀਵਾ ਹੋ ਕੇ ਰਹਿਣਾ ਨਿਬਰਤਾ ਆਨੰਦ ਇਹਦੇ ਵਿਚਾਰੰਦਾ ਕਿਵੇਂ ਗਰੀਬੀ ਤੇ ਆਨੰਦ ਰੰਕਾਰ ਚਾਹਨੰਦ ਨਹੀਂ ਹੈ ਕਾਲ ਸ੍ਰੀਕਤ ਹੈ। ਅਨੰਦ ਖਾਇਜ ਸਹਿਜ ਤਿਕਾਉ ਹੈ। ਜੇ ਤਿਕਾਉ ਹੈ ਤਾਂ ਆਨੰਦ ਹੈ। ਜੇ ਤਿਕਾਉ ਨਹੀਂ ਤਾਂ ਆਨੰਦ ਵੀ ਹੈ ਨਹੀਂ। ਬੰਦ ਸਹਿਜ ਅਵਸਥਾ ਚ ਜਾਗਰਤ ਅਵਸਥਾ ਚ ਬੰਦ ਠੀਕਿਆ ਹੋਇਆ। ਸੁਪਨਾ ਦੇਖਦਾ ਹੀ ਨਹੀਂ। ਪਰ ਕੀ ਕਰਦਾ ਫਿਰ? ਜਪਤਰ ਰਾਂ ਗੁਣਤਾ ਉਸਦੇ ਗੁਣਾਂ ਨੂੰ ਜਪਤਰ ਰਹਿੰਦਾ। ਗੁਣਾਂ ਨੂੰ ਇਹ ਸਮਝਦਾ ਰਹਿੰਦਾ ਕਿਹਨਾਂ ਤੋਂ ਗਾਂਹ ਕੌਣ ਵਧੀ ਜਾਂਦੇ ਨੇ। ਗੁਣ ਹੋਰ ਹੋਰ ਗੁਣਾ ਦਾ ਗਿਆਨ ਹੁੰਦਾ ਚੱਲ ਜਾਂਦਾ ਜਿਉਂ-ਜਿਉਂ ਗੁਣਾ ਦਾ ਗਿਆਨ ਹੁੰਦਾ ਜਿਉਂ-ਜਿਉਂ ਜਪਦਾ ਗੁਣਾ ਨੂੰ ਤੇ ਉਹ ਨਾਮ ਗ੍ਰਹਿਮਾਲ ਆ ਦੁਨੀਆ ਦੇ ਵਿੱਚ ਜਿਹੜਾ ਜੀਵਨ ਹੈ ਉਹ ਜੀਵਨ ਕੋ ਵਾਂਗੂ ਖੇਲਦੇ ਨੇ ਖੇਲੈ ਬਿਕਸ਼ੈ ਖੁਸ਼ ਰਹਿੰਦੇ ਨੇ ਖੇਡਿਆ ਸਭ ਸਾਲ ਖੇਡਮਦ ਕੇ ਚੱਲਦੇ ਨੇ ਆਨੰਦ ਸਿਉ ਅਨੰਦ ਲੈਣ ਲਈ ਉਹ ਇਹ ਨੋਦ ਲੈ ਸਕਦੇ ਨੇ ਜੇਲੇ ਨੂੰ ਖੇਲ ਬੰਦੇ ਨੇ ਕਾਟਾਵਾਦ ਦਾ ਸਭ ਖੇਲ ਹੈ ਜਮਨ ਬੰਦ ਦਾ ਖੇਲ ਹੈ ਜਆ ਸਭ ਜਆ ਖੇਲ ਹੈ ਉਹਦਾ ਅਨੰਦ ਸਿਵਨ ਜਦ ਕੋ ਹੋਤ ਕਿਰਪਾਲ ਪਰ ਉਹੀ ਇਹ ਖੇਡ ਖੇਡ ਸਕਦਾ ਜਿਹਦੇ ਤੇ ਕਿਰਪਾ ਹੋ ਜਾਏ ਪਰ ਬੁੱਧ ਬਦਲੀ ਜਾਵੇ ਸਦੀਵ ਗਨੀਵ ਸਵਾਵਣ ਸਵਾਵਣ RAM ਨਾਮ ਗਹਿਮਾਰ ਉਹਦੇ ਸਦੀਵ ਵੇਖਿਆ ਲਈ ਜਦੀਬ ਸਵਾਵਣੂ ਉਹਦੇ ਅੰਦਰ ਬਹੁਤ ਜਿਵੇਂ ਸਵਾਵਣਾ ਹੁੰਦਾ ਹੈ ਉਹ ਸੁਖਦਾ ਹੈ ਮਤਲਬ ਹੈ ਉਹਦੇ ਅੰਦਰ ਸੁਖ ਰੇਖਾ ਟਿਕਿਆ ਰਹਿੰਦਾ ਹੈ ਅਨੰਗਣ ਤੋਂ ਸੁਖ ਨੂੰ ਪ੍ਰਾਪਤ ਹੁੰਦੇ ਨੇ ਹੰ ਮਤਲਬ ਹੈ ਤੋ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਰਾਮਨਾਮ ਗਏ ਮਾਰ ਧਾਰੋ ਦੇ ਰਾਮਨਾਮ ਦਾ ਦੌਲਤ ਰਹਿੰਦੀ ਹੈ ਜਿਹਦੇ ਕਾਰਨ ਆਮਦੋਬ ਦੀ ਦੌਲਤ ਰਹੇ ਬੇਅੰਤ ਉਹ ਹਮੇਸ਼ਾ ਹੀ ਉਹ ਸੁਖੀ ਔਰ ਖੁਸ਼ ਰਹੂਗਾ ਹਾਂਜੀ ਖੇਦ ਨਾ ਦੁਖ ਨਾ ਦਾਨ ਤਹਿ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਪਾਣਿਆ ਪੂਰੀ ਤਿਨਾਪਰੀ ਖੇਦ ਉਹ ਕਿਸੇ ਚੀਜ਼ ਦਾ ਨਹੀਂ ਹੁੰਦਾ ਅਫਸੋਸ ਕਿਸੇ ਗੱਲ ਦਾ ਨਹੀਂ ਹੁੰਦਾ ਨਾ ਦੁੱਖ ਹੁੰਦਾ ਕਿਸੇ ਗੱਲ ਦਾ ਨਾ ਉਹਨੂੰ ਡੰਨ ਲੱਗਦਾ ਹੈ ਨਾ ਉਹਨੂੰ ਕੋਈ ਮਤਲਬ ਹੈ ਉਹਦੇ ਤੇ ਕੋਈ ਕੋਈ ਖਤਰਾ ਹੈ ਜਾਂ ਕੋਈ ਨਹੀਂ ਹੁੰਦੀ ਗਲਤੀ ਕੋਈ ਨਹੀਂ ਕਰਦਾ ਦੰਦ ਕਿਹੜੀ ਚੀਜ਼ ਆ ਲੈਣ। ਨਾ ਦੁੱਖ ਚੀਜ਼ਾਂ ਉਹ ਨਹੀਂ ਇੱਥੇ। ਦੰਨਾ ਦਾ ਡਰ ਹੈ। ਹੈ ਨਹੀਂ ਜਾਂ ਦੱਲ ਨਹੀਂ ਤਾਂ ਧਰਵੀ ਹੈ ਨਹੀਂ। ਜਾਂ ਕੋ ਨਜ਼ਰ ਖੜੀ ਜਿੱਦੇ ਤੇ ਕਿਰਪਾ ਹੋ ਜਾਏ। ਸ਼ਬਦ ਸੁਤ ਦਾ ਮੇਲ ਹੋ ਜਾਏ। ਉਹਨੂੰ ਇਹਨੇ ਚੀਜ਼ਾਂ ਨਹੀਂ ਰਹਿੰਦੀਆਂ ਉਹਦੇ ਕੋਲ। ਨਾਨਕ ਜੋ ਪ੍ਰਭ ਆਣਿਆ ਨਾਨਕ ਕਹਿੰਦਾ ਜੋ ਪ੍ਰਭ ਦੇ ਆਣੇ ਦੇ ਵਿੱਚ ਆ ਗਿਆ ਜਿਹਨੂੰ ਪ੍ਰਭ ਸਤਿ ਆਣਾ ਮਿੱਠਾ ਲੱਗ ਗਿਆ ਪੂਰੇ ਦਿਨਾਂ ਭਲੇ ਦੀ ਬੁੱਧ ਪੂਰੀ ਹੋ ਗਈ ਉਹਨਾਂ ਨੇ ਉਹਨਾਂ ਦਾ ਜੀਵਨ ਉਹਨਾਂ ਸਫਲਾ ਹੋ ਗਿਆ ਉਹਨਾਂ ਦੀ ਯਾਤਰਾ ਪੂਰੀ ਹੋ ਗਈ ਬਸ ਸੰਸਾਰ ਦੀ ਯਾਤਰਾ ਉਹਨਾਂ ਦੀ ਪੂਰੀ ਹੋ ਕੇ ਸਮਾਪਤ ਹੋ ਗਈ ਅਗੇ ਨਹੀਂ ਹੋਣਾ ਉਹਨਾਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਉਹਨਾਂ ਨੇ ਠੀਕ ਹੈ ਜੀ ਅੱਹ इस पौड़ी ਪੌੜੀ ਸਮਾਪਤੀ ਆ ਜੀ ਅਗਲੀ ਪੌੜੀ ਦਾ ਉਪਦੇਸ਼ ਹੈਗਾ ਜੀ 49 ਨੰਬਰ ਪੌੜੀ 'ਚ ਪੌੜੀ ਹੋਜੀ ਖਖਾ ਖਰਾ ਸਰਾਹੋ ਤਾਹੂ ਜੋ ਖਿੰਨ ਮੈਂ ਊਨੇ ਸੁਬਰ ਪਰਾਹੂ है ਹੈ ਜਿਹੜਾ ਉਹਦੀ ਸਿਫਸਲਾ ਕਰਨੀ ਚਾਹੀਦੀ ਆ ਸਰਾਹੋ ਤਾਹੂ ਖਰਾ ਕਰਕੇ ਸੱਚ ਕਰਕੇ ਸੱਚਾ ਕਰਕੇ ਖਰਾ ਸੱਚਾ ਹੁੰਦਾ ਠੀਕ ਹੈ ਜੀ ਸਿੱਟਾ ਕਰ ਨਹੀਂ ਬਣਦੀ ਐ ਜੇ ਖੇਂਦੇ ਵਿੱਚ ਜਿਹੜੇ ਓਣੇ ਨੇ ਜਿਹਨਾਂ 'ਚ ਕਵੀ ਗਿਆਨ ਦੀ ਉਹਨਾਂ ਨੂੰ ਐਨ ਫੁੱਲ ਭਰ ਦਵੇ ਉਹਦੀ ਸਿੱਟਾ ਕਰਦੀ ਜੋਗ ਹੈ ਉਹ ਕੌਣ ਹੋਊਗਾ ਉਹ ਪੂਰਾ ਗੁਰੂ ਕੋਈ ਪੂਰਾ ਗੁਰ ਕਾ ਸੁਣ ਉਪਦੇਸ਼ ਪੂਰੇ ਗੁਰਦਾ ਉਪਦੇਸ਼ ਹੈ ਜਿਹੜਾ ਇਹੀ ਕਰ ਸਕਦਾ ਇਸ ਕਰਕੇ ਪੂਰੇ ਗੁਰਦਾ ਆ ਪੂਰੇ ਗੁਰਦੇ ਉਪਦੇਸ਼ ਦਾ ਉਪਦੇਸ਼ ਦੀ ਸਫਸਲਾ ਕਰਦੀ ਜੀ ਜੋਗ ਹੈ ਗੁਰਬਾਣੀ ਪੂਰੇ ਗੁਰका ਉਪਦੇਸ਼ ਹੈ ਹਾਂਜੀ ਖਰਾ ਨਿਮਾਣਾ ਹੋਤ ਪ੍ਰਾਨੀ ਅੰਨ ਦਿਨ ਜਾਪੇ ਪ੍ਰਭ ਨਿਰਵਾਨੀ ਖਰਾ ਹੋਵੇ ਜੇ ਪ੍ਰਾਨੀ ਤਨ ਮਾਣਾ ਹੋਵੇ ਉਹ ਮਾਣਾ ਹੋਵੇ ਖਰੇ ਪੰਦਾ ਮਾਣ ਨਹੀਂ ਕਰੀਦਾ ਖਰਾ ਨਿਮਾਣਾ ਹੋਤ ਪ੍ਰਾਨੀ ਪ੍ਰਾਣੀ ਜੇ ਖਰਾ ਹੋਵੇ ਉਹ ਨਿਮਾਣਾ ਹੁੰਦਾ। ਜੇ ਮਾਨ ਕਰੇ ਤਾਂ ਖਰਾ ਹੁੰਦਾ ਹੀ ਨਹੀਂ ਕਿਤੇ ਮਾਨਾ ਫਰਾਨੀ ਹੁੰਦਾ। ਜੇ ਖਰਾ ਪ੍ਰਾਣੀ ਹੋਵੇ ਵੀ ਹੁੰਦਾ ਹੈ ਉਹ। ਖਰਾ ਪ੍ਰਾਣਾ ਹੋ ਤਾ ਪ੍ਰਾਣੀ। ਹਾਂਜੀ ਪ੍ਰਭ ਨਿਰਭਾਨੀ। ਪ੍ਰਭ ਨਿਰਭਾਨੀ ਜਿਹੜਾ ਸ਼ਬਦ ਗੁਰੂ ਹੈ ਜਿਹੜਾ ਨਿਰਭਾਨੀ। ਜੋ ਬੂਝ ਬੋਲਣ ਵਾਲੀ ਬਾਣੀ ਨਹੀਂ ਬੂਝਾ ਬੋਲਣ ਵਾਲੀ ਬਾਣੀ ਨਹੀਂ ਉਹ ਤੁਰਤੀ ਬਾਣੀ ਹੈ ਉਹਦੇ ਨਾਲ ਜੁੜਿਆ ਰਹਿੰਦਾ ਹੈ ਉਹ ਉਹ ਨੂੰ ਸਾਖਸ਼ਾਤ ਰਹਿੰਦਾ ਸ਼ਬਦ ਗੁਰੂ ਤਾਂ ਕਰਕੇ ਨਮਾਣਾ ਰਹਿੰਦਾ ਹੈ ਕਰਾਮਾਤ ਸਾਰੀ ਉਹ ਤੁਰਤੀ ਬਾਣੀ ਦੀ ਹੈ ਉਹਦੇ ਕੋਲ ਕੀ ਹੈ ਉਹ ਸੱਚ ਬੋਲਦਾ ਕੋਈ ਯਕੀਨ ਕਰੇ ਕੋਈ ਨਾ ਕਰੇ ਹਾਂਜੀ भाव है खसमता हुआ सुख देता पार ब्रह्म ऐसो अगणता ज्यों कदम पाजवे सच पाजवे तो सच नहीं सुख देना है ओ सुख तो नहीं मिलना पार ब्रह्म गिनती विच नहीं है ओदे ओदे वर्गा कोई दुआ नहीं है वो ऐसा गिनती तो परे है वो दुआ है इनी उदे नाल तो परे है हां खते ਕਿੰਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਦਾ ਹੀ ਸਾਡੀਆਂ ਅਸੰਖ ਗਲਤੀਆਂ ਨੂੰ ਇੱਕ ਛੰਟ ਜੇ ਬਖਸ਼ ਦਿੰਦਾ ਬਖਸ਼ਣ ਹਾਰਾ ਉਹ ਕਰਦਾ ਵੀ ਤੁਸੀਂ ਗਲਤੀਆਂ ਕਰੀ ਗਏ ਹੋ ਚਿਰ ਕਿਉਂ ਕੀਤੀਆਂ ਕਿ ਨਿਯਮ ਹੈ ਜੇਦਾ ਇੱਕ ਵਾਰ ਕਹਿ ਦੇਵੇਂ ਇੱਥੇ ਗਲਤੀ ਹੋ ਗਈ ਜਦੇ ਵਕਤੰਦ ਨਾਨਕ ਸਾਹਿਬ ਸਦਾ ਦਿਆਰਾ ਸਦਾ ਦਿਆ ਦਾ ਬਖਸ਼ਣ ਵਾਸਤੇ ਉਹ ਤਾਂ ਬੈਠਾ ਕੋਈ ਜਾਣਦਾ ਵੀ ਇਹ ਬਖਸ਼ਾਉਣ ਨਾ ਬਖਸ਼ਾਉਣ ਦੀ ਘਾਟ ਹੈ ਬਖਸ਼ਣ ਵਾਲੀ ਦੀ ਕੋਈ ਘਾਟ ਠੀਕ ਹੈ ਜੀ ਇੱਥੇ 49ਵੀਂ ਪੌੜੀ ਦਾ ਸੰਦੇਸ਼ ਸਮਾਪਤ ਹੈ ਜੀ ਹੁਣ ਇੱਕ ਹੋਰ ਪੌੜੀ ਹੈ ਜੀ 53 ਨੰਬਰ ਪੌੜੀ ਹਾਂ ਜੀ ਵੀ ਖੱਖੇ ਅੱਖਰ ਦਾ ਉਪਦੇਸ਼ ਹੈ ਜੀ ਅੱਛਾ ਪੌੜੀ खेलत खेलत आयो, अनेक जोन दुख पाए। मिलत, खेलत खेल ਖੇਲਤ ਆਇਓ ਅਨੇਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਈ ਖੇਲਤ ਖੇਲਦਾ ਆਇਓ ਖੇਲਦਾ ਖੇਲਦਾ ਸੰਸਾਰ ਦੇ ਵਿੱਚ ਖੇਡ ਸੰਸਾਰ ਦੀ ਖੇਡ ਖੇਡਦਾ ਖੇਡਦਾ ਆ ਗਿਆ ਆ ਪਤਾ ਹੋਇਆ ਦੁਖ ਪਉਦਾ ਬਚਨ ਸਮਾਏ ਉਹ ਜਿਹੜੇ ਸਤਿਗੁਰ ਦੇ ਸੇ ਐਸੇ ਉਹ ਹਿਰਦੇ ਚ ਸਮਾਏ ਨੇ ਸਾਰੇ ਜਿੰਨੇ ਖੇਤੀ ਹਟ ਗਏ ਸਤਿਗੁਰ ਦੇ ਬਚਨਾਂ ਦੇ ਨਾਲ ਐਸਾ ਅਸਰ ਹੋਇਆ ਉਹਨਾਂ ਦੇ ਬਚਨਾਂ ਦਾ ਜਿੰਨੇ ਜਿੰਨੇ ਗਲਤੀਆਂ ਸੀਆਂ ਕੀਤੀਆਂ ਭੁਗਤੇ ਜੋ ਕੋਤੇ ਉਹਦਾ ਖੇਤ ਸੀ ਆ ਗਲਤੀ ਕੀਤੀ ਉਹ ਤਾਂ ਅੰਦਰ ਸੀ ਬਾਹਰ ਟੋਲਦਾ ਰਿਹਾ ਲੋਕਾਂ ਦੀ ਗੱਲ ਉਹ ਸਾਰੇ ਘਤਮ ਹੋ ਗਏ ਵੀ ਇਹ ਸੀ ਜੋ ਹੋਇਆ ਹੋ ਗਿਆ ਉਹ ਵੀ ਠੀਕ ਆ ਜੋ ਹੁਣ ਹੋਇਆ ਉਹ ਵੀ ਠੀਕ ਹੈ ਇਹ ਸੀ ਜੋ ਠੀਕ ਹੈ ਜੀ ਸਾਧੂ ਮਿਲਤ ਪਾਵੇ ਕੀ ਸਾਧੂ ਵਰ ਸਤਿਗੁਰ ਇੱਕੇ ਆ ਜੀ ਖੇਤ ਮਿਟੇ ਸਾਧੂ ਮਿਲਤ ਹਾਂ ਆਪਣੇ ਹੋਰ ਮਿਲਣਾ ਬਾਹਰ ਟੋਲਦਾ ਸੀ ਕਿਸੇ ਹੋਰ ਨੂੰ ਆਪਣਾ ਮੂੰਹ ਢੋਲਿਆ ਲਈ ਠੀਕ ਹੈ ਕਹਿੰਦਾ ਭਾਪ ਸਾਧੂ ਤੇ ਸਤਗੁਰ ਦਾ 1 ਇੱਕੇ ਭਾਗ ਹਾਂਜੀ ਬਿਲਕੁਲ ਭਾਗ ਠੀਕ ਹੈ ਜੀ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਬਿਸ਼ਰਾਮ ਖਿਮਾ ਗਹੀ ਸੱਚ ਸੰਚਿਓ ਖਿਮਾ ਦਾ ਲੜ ਫੜ ਲਿਆ ਨਾ ਤਿਆਗ ਦਾ ਲੜ ਫੜ ਲਿਆ ਜਿਨੇ ਬੁਰਾਈ ਕੀਤੀ ਹੈ ਉਹ ਵੀ ਮਾਫ ਬਸ ਕੋਈ ਸਾਰੇ ਵਖਤ ਹੈ ਜਿਨੇ ਕੋਈ ਬੁਰਾਈ ਕੀਤੀ ਹੈ ਸਾਰੇ ਵਖਤ ਕੋਈ ਕਰੇ ਨਹੀਂ ਸਕਦਾ ਸੀ ਇਹ ਮੈਂ ਗਲਤੀ ਸੀ ਗੁੱਸੇ ਦਾ ਸੱਚ ਸੱਚਿਓ ਜੇ ਸੱਚ ਦਾ ਸੰਚਾਰ ਹੋਇਆ ਤੇ ਸੱਚ ਦੀ ਸਮਝ ਆਈ ਤਾਂ ਖਿਮਾ ਦਾ ਲੜ ਫੜ ਲਿਆ ਖਾਯੋ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਖਾਣਾ ਜਦੋਂ ਲੱਗਿਆ ਲਈ ਉਹਨਾਂ ਜਿਹੜਾ ਮਰਦ ਨਾਮੇ ਨਹੀਂ ਖਾਦਾ ਉਹ ਇੱਕ ਉਹੜਾ ਲੱਗਦਾ ਸੀ ਤੇ ਕਹਿੰਦਾ ਸੀ ਬੈਰੀ ਬਗਾਨਾ ਇੱਕ ਕਰਮ ਨੂੰ ਬੰਦਾ ਨਹੀਂ ਸੀ ਲੱਗਦਾ ਇਹ ਗੱਲ ਬੁਰੇ ਦਾ ਭਲਾ ਕਰਨ ਨੂੰ ਕਹਿੰਦਾ ਸੀ ਉਹ ਵੀ ਮੁਸ਼ਕਲ ਲੱਗਦੀ ਸੀ ਗੱਲ ਖਰੀ ਕਿਰਪਾ ਠਾਕੁਰ ਭਾਈ ਆਨੰਦ ਸੂਖ ਵਿਸਰਾਮ ਪਰ ਦੀ ਕਿਰਪਾ ਵੀ ਖਰੀ ਹੋਈ ਉਹਨੇ ਵੀ ਆਪਣਾ ਖਰਾਪਨ ਦਿਖਾਇਆ ਉਹਦੀ ਕਿਰਪਾ ਦਾ ਵੀ ਪਤਾ ਲਗਿਆ ਵੀ ਉਹਦੀ ਕਿਰਪਾ ਵੀ ਸੱਚੀ ਹੈ ਖਰੀ ਸੱਚੀ ਉਹਦੀ ਕਿਰਪਾ ਵੀ ਵਾਕਈ ਹੋਈ ਰੰਗ ਲੈ ਆਈ ਉਹਨੇ ਵੀ ਆਪਣਾ ਰੰਗ ਭਾਈ ਜੀ ਹੋਇਆ ਆਨੰਦ ਸੁਖ ਵਿਸਰਣ ਐਨ ਮੰਟੇ ਗਿਆ ਆਨੰਦ ਦੇ ਵਿੱਚ ਟੇ ਸੁਖ ਟੇ 'ਚ ਨਵਾਸ ਹੋ ਗਿਆ ਲੋ ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਮਿਲੇ ਭਗਵੰਤ ਜੇ ਨਵਾਈ ਜਿੰਨਾ ਕੁਛ ਇਕੱਠਾ ਕੀਤਾ ਸੀ ਗਿਆ ਨਾ ਬਸ ਉਹ ਕੁਝ ਕੁਛ ਵੀ ਨਹੀਂ ਸੁੱਟਣਾ ਪਿਆ ਬੇਵਕੀ ਸਾਰਾਈ ਸਾਰਾ ਖਰਾ ਨਿਕਲਿਆ ਖੋਟ ਥਿਓ ਨਹੀਂ ਇਹ ਉਹ ਗੱਲ ਹੈ ਉਹਦੇ ਖੋਟੇ ਨਹੀਂ ਸੀ ਕੁਝ ਜਿੰਨੀ ਖੇਪ ਜਿੰਨਾ ਮਾਲ ਸੀ ਗਿਆਨ ਲੱਦਿਆ ਹੋਇਆ ਸੀ ਪੂਰੇ ਦਾ ਪੂਰਾ ਕਹਤਾ ਵੀ ਠੀਕ ਐ ਕੁਝ ਵੀ ਕਮੀ ਨਹੀਂ ਕਿਬਨ ਵਾਈ ਬਹੁਤ ਲਾਭ ਲਾਭ ਤਾਂ ਫਿਰ ਹੋਣਾ ਹੀ ਸੀ ਸਾਰਾ ਲਾਭੇ ਲਾਭ ਸੀ ਵਿੱਚ ਘਟਾਤਾ ਹੀ ਨਹੀਂ ਸੀ ਕੁਝ ਖੋਟ ਹੈ ਨਹੀਂ ਸੀ ਵਿੱਚ ਕਾਰਾਏ પતિਵੰਤ ਆ ਬੜਿਆ ਇੱਜ਼ਤ ਬਚਾ ਕੇ ਆ ਕਾਰਾ ਆ ਗਿਆ ਇਟਰੀ ਹੋ ਗਈ પતિਵੰਤ ਸਾਹੀ પતિਵੰਤ ਹੋ ਗਿਆ ਇੱਜ਼ਤ ਵਾਲਾ ਬਣ ਗਿਆ ਖਰਾ ਦਲਾਸਾ ਗੁਰਦੀਆ ਗੁਰਦੇ ਵੀ ਖਰਾ ਦਲਾਸਾ ਦਿੱਤਾ ਸੀ ਬਾਹਰ ਕਿਹਾ ਸੀ ਐਦਾਂ ਹੋ ਗਿਆ ਜੋ ਦਲਾਸਾ ਸਤਿਗੁਰੂ ਨੇ ਦਿੱਤਾ ਸੀ ਉਹ ਵੀ ਖਰਾਬ ਉਤਰਿਆ ਉਹ ਵੀ ਸੱਚਾ ਹੀ ਸਾਬਤ ਹੋਇਆ ਆਏ ਮਿਲੇ ਭਗਵੰਤ ਭਗਵੰਤਾ ਦੇ ਮਿਲ ਆਪਨ ਕੀਆ ਕਰੈ ਆਪ ਅੱਗੇ ਪਾਛੇ ਆਪ ਨਾਨਕ ਸੋ ਸਰਾਹੀਏ ਜੇ ਘਟ ਘਟ ਰਹਾ ਵਿਆਪ ਆਪਣਾ ਹੀ ਹੋਇਆ ਪਿੱਛੇ ਸੀ ਗੁਰੂ ਹੀ ਕਰ ਰਹੇ ਆਪਾਂ ਪਹਿਲਾਂ ਅੱਗ ਪੈਰ ਕੋਹੜਾ ਮਹਾਲਾ ਸੀਗਾ ਹੁਣ ਆਪਣੇ ਲਈ ਆਪਣਾ ਆਪੇ ਦਾ ਸਵਾਲ ਲਿਆ ਕਿ ਵੀ ਆਪਣਾ ਕੀਤਾ ਸੀ ਗਾਂ ਵੀ ਆਪਣਾ ਆਪੇ ਕੀਤਾ ਕੀਤਾ ਆਪ ਅੱਗੇ ਪੱਛੇ ਆਪ ਅੱਗੇ ਪਿੱਛੇ ਆਪੇ ਸੀ ਇਹ ਤੂੰ ਤੇਰੀਆਂ ਗਲਤੀਆਂ ਦੀਆਂ ਤੈਂ ਗਲਤੀਆਂ ਸੁਧਾਰ ਲਈ ਨਾਨਕ ਜੇ ਕੱਖ ਸੱਟ ਰਿਹਾ ਵਿਆਪ ਨਾਨਕ ਨੇ ਸਿਰਫ ਸਲਾ ਕਰੀਏ ਜਿਹੜਾ ਕਟਕਟ ਵਿਆਪਿਆ ਹੈ ਕਟਕਟ ਕੇ ਬਸਿਆ ਹੋਇਆ ਹੈ ਠੀਕ ਹੈ ਜੀ ਆਪਣਾ ਮੂਲ ਹੈ ਜੀ ਠੀਕ ਹੈ ਜੀ ਇੱਥੇ ਇਹ ਤੀਸਰੀ ਜਿਹੜੀ ਪੌੜੀ ਸੀਗੀ 53 ਨੰਬਰ ਇਹਦੀ ਸਮਾਪਤੀ ਹੈ ਜੀ ਤੇ ਨਾਲੇ ਜੋ ਖਖੇ ਅੱਖਰ ਦਾ ਉਪਦੇਸ਼ ਚਾਰੇ ਬਾਣੀਆਂ ਚੋਂ ਜਿਹਦੇ ਚੋਂ ਕਿ ਗੁਰੂ ਅਮਰਦਾਸ ਜੀ ਨੇ ਨਹੀਂ ਲਿਖਿਆ ਕੋਈ ਵੀ ਖਖੇ ਅੱਖਰ ਦਾ ਉਪਦੇਸ਼ ਬਾਕੀ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਤੇ ਪੰਨਵੇਂ ਪਾਤਸ਼ਾਹ ਨੇ ਖਖੇ ਅੱਖਰ ਦਾ ਉਪਦੇਸ਼ ਜੋ ਹੈ ਉਹ ਇੱਥੇ ਸਮਾਪਤ ਹੈ ਜੀ